ਗੁਰੂ ਨਾਨਕ ਪਾਤਸ਼ਾਹ ਨੇ ਆੜ ਕੇ ਸ੍ਰੀ ਗੁਰੂ ਰਾਜ ਚਲਾ ਦਿੱਤਾ ਨਹੀਂ ਰੱਖ ਦਿੱਤੀ ਗੁਰੂ ਰਾਜ ਦੀ ਸੰਸਾਰ ਵਿੱਚ ਕਲ ਯੁਗ ਦੇ ਜਮਾਨੇ ਵਿੱਚ ਕਹਿੰਦੇ ਨੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਾ ਲੈਣੇ ਧਰਿਓ ਨਿਸ਼ਤਰ ਸ਼ੇਰ ਕਰਿ ਸਿਫਤੀ ਅਮਰਤ ਪੀਮਦਾ ਗੁਰ ਨਾਨਕ ਨਿਕਟ ਬਸਾ ਬਨਵਾਰੀ ਤਿੰਨ ਲੈਣਾ ਥਾਪ ਜੋਤ ਜਗ ਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦਿਆ ਇਹ ਰਾਜ ਚਲਾ ਦਿੱਤਾ ਤੇ ਗੁਰੂ ਨਾਨਕ ਦੇ ਰਾਜ ਵਿੱਚ 12ਵੇਂ ਮਾਲਕ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ। ਬਾਹਰ ਬਾਜਾਂ। ਆ ਹੁਣੇ ਕਥਾ ਵਿੱਚ ਸਤਗੁਰਾਂ ਦੀ ਰਸਨਾ ਤੋਂ ਆਪ ਨੇ ਸਰਬਣ ਕੀਤਾ ਸੀ ਮੈਂ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ। ਯਾਨੀ ਦੁਬਾਰਾ ਖਾਲਸਾ ਸੰਤ ਖਾਲਸਾ ਦੀ ਰਚਨਾ ਹੋਵੇਗੀ। ਇਹ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਸੀ ਰਕਨਦੀਨ ਦੇ ਨਾਲ ਚਰਚਾ ਕਰਦਿਆਂ ਹੋਇਆ। ਦੁਬਾਰਾ ਖਾਲਸਾ ਪ੍ਰਗਟ ਹੋਵੇਗਾ। ਉਹ ਸਤਗੁਰੂ ਰਾਮ ਸਿੰਘ ਪਾਤਸ਼ਾਹ ਨੇ ਕੀਤਾ ਧਰਮ ਪ੍ਰਚਾਰ ਆਰੰਭ ਕੀਤਾ ਤੇ ਪ੍ਰਚਾਰ ਕਰਦਿਆਂ ਹੋਇਆਂ ਹੁਣ ਦਰਸਨ ਐਸਾ ਸੀ ਜਦੋਂ ਸਤਗੁਰਾਂ ਨੇ ਪ੍ਰਚਾਰ ਆਰੰਭ ਕੀਤਾ ਤੇ ਇਹਨਾਂ ਦੇ ਕੋਲ ਆਪਣਾ ਸਮਾਨ ਪ੍ਰਬੰਧ ਸਾਰਾ ਆਪਣਾ ਹੁੰਦਾ ਸੀ ਪਿੰਡਾਂ ਦਾ ਦੌਰਾ ਹੁੰਦਾ ਸੀ ਗੱਡਿਆਂ ਦੇ ਉੱਤੇ ਊਠਾਂ ਦੇ ਉੱਤੇ ਘੋੜਿਆਂ ਦੇ ਉੱਤੇ ਇਹ ਦੌਰਾ ਹੁੰਦਾ ਸੀ ਰਸਤ ਪਾਣੀ ਘਰੋਂ ਲੱਦ ਕੇ ਚੱਲਣਾ ਗੱਡੇ ਉੱਤੇ ਜਿੱਥੇ जाके पेंड ਪਿੰਡ करना ਕਰਨਾ ਉੱਥੇ دیਵਾਨ लंगर ਲੰਗਰ ਹੋਣ ਲੱਗ ਪੈਣਾ ਪਿੰਡ ਵਾਲਿਆਂ ਨੇ ਆਣ ਕੇ ਅਰਜ ਕਰਨੀ ਪਾਤਸ਼ਾਹੇ ਲੰਗਰ ਦੀ ਸੇਵਾ ਸਾਨੂੰ ਦਿੱਤੀ ਜਾਏ ਤੇ ਸਤਗੁਰਾਂ ਨੇ ਇੱਕ ਸ਼ਰਤ ਰੱਖੀ ਸੀ ਸ਼ਰਤ ਐਸੀ ਕਿ ਮਾਸ ਤੇ ਸ਼ਰਾਬ ਛੱਡ ਕੇ ਤੇ ਭਜਨ ਪੁਛ ਲੋ ਤੇ ਤੁਹਾਡਾ ਲੰਗਰ ਤਾਂ ਪ੍ਰਵਾਨ ਹੋਏਗਾ ਨਹੀਂ ਤੇ ਨਹੀਂ ਪ੍ਰਵਾਨ ਹੋਏਗਾ ਇਹ ਪੁਰਾਣੀ ਮਰਜ਼ਾਦਾ ਸੀ ਗੁਰੂ ਨਾਨਕ ਤੋਂ ਲੈ ਕੇ ਚੱਲੀ ਆਉਂਦੀ ਸਤਗੁਰੂ ਰਾਮ ਸਿੰਘ ਤੇ ਜਿੰਨਾ ਦਾ ਦਰਸ਼ਨ ਕਰਕੇ ਬੜੇ ਬੜੇ ਖੱਬੀ ਖਾਨ ਤੇ ਆਕਰਬਾਜ ਆਣ ਕੇ ਚਰਨਾਂ ਤੇ ਝੁਕ ਜਾਂਦੇ ਸੜ ਕਿਸੇ ਕਵੀ ਨੇ ਕਹਿ ਦਿੱਤਾ ਨਾ ਆਖੜਾ ਦਾ ਹੋ ਸਕਾ ਕੋਈ ਤੇਰੀ ਪਬਕਾਰ ਕੇ ਅੱਗੇ ਆਜੀ ਚੁਕਾਏ ਤਾਜਸ਼ਾਹ ਹੋਨੇ ਤੇਰੀ ਦਸਤਾਰ ਕੇ ਅਗੇ ਚੁਕਾਏ ਤਾਜਸ਼ਾਹ ਹੋਨੇ ਤੇਰੀ ਦਸਤਾਰ ਕੇ ਅਗੇ ਸ਼ਾਹ ਹੋਲੇ ਤੇਰੀ ਦਸਤਾਰ ਕੇ ਚੁਕਾਏ ਤਾਜਸ਼ਾਹ ਹੋਨੇ ਤੇਰੀ ਦਸਤਾਰ ਕੇ ਅਗੇ ਤਾਜਸ਼ਾਹ ਹੋਨੇ ਤੇਰੀ ਦਸਤਾਰ ਕੇ ਅਗੇ ਚੁਕਾਏ ਤਾਜਸ਼ਾਹ ਹੋਨੇ age kirtan aave chukaye jitaj shahone teri dastar ke aake shaale teri dastar ke aage kirtan aave teri dastar ke aage teri dastar ke aage teri dastar ke aage ਦਰਖੇ ਆਕੇ ਤੇਰੀ ਦਸਤਾਰ ਕੇ ਆਕੇ ਦਰਖੇ ਆਕੇ ਤੇਰੀ ਦਸਤਾਰ ਚੁਕਾਏ ਤਾਜਸ਼ਾਹ ਹੋਲੇ ਤੇਰੀ ਦਸਤਾਰ ਕੇ ਆਕੇ ਚੁਕਾਏ ਤਾਜਸ਼ਾਹ ਹੋਲੇ ਤੇਰੀ ਦਸਤਾਰ ਕੇ ਆਕੇ ਤਾਜਸ਼ਾਹ ਹੋਲੇ ਚੁਕਾਏ ਤਾਜਸ਼ਾਹ ਹੋਲੇ ਰਾਮ ਸਿੰਘ ਜੀ ਨੇ ਪ੍ਰਚਾਰ ਆਰੰਭ ਕੀਤਾ ਤੇ ਇਹਨਾਂ ਦੀ ਚੜ੍ਹਦੀ ਕਲਾ ਦੇਖ ਕੇ بڑے بڑے ਰਾਜੇ ਕੰਬ ਉੱਠੇ ਫਿਕਰ ਪੈ ਗਿਆ ਸਾਮਰਾਜ ਨੂੰ ਆਲਮਜੀਂ ਕਹਿੰਦੇ ਨੇ ਕੰਬ ਦੇ ਸੀ ਰਾਜੇ ਮਹਾਰਾਜਿਆਂ ਨੂੰ ਖੋਪਿਓ ਦਾ ਝੱਲਦਾ ਨਾ ਕੋਈ ਉਸ ਪ੍ਰੀਤਮ ਦੀ ਝਾਲਾ ਸੀ ਝਿਜਕਦੇ ਫਰੰਗੀ ਉਹਦੀ ਵੇਖ ਜਥੇ ਲੱਖਾਂ ਸੇਵਕਾਂ ਨੂੰ ਵੇਖ ਚਿਤ ਹੋਮਦਾ ਦੁਖਾਲਾ ਸੀ ਤੇ ਚੋਰ ਤੜਵੈਲ ਡਾਕੂ ਦੇ ਜੋ پاسਿਓ ਦੇ ਪੁੱਛ ਕੇ ਭਜਨ ਜਾਪ ਜਪਦੇ ਅਕਾਲਾ ਸੀ ਚੜਦਾ ਜਾਂ ਦੌਰੇ ਪੈਂਦਾ ਵਕਤ ਫਰੰਗੀਆਂ ਨੂੰ ਚਾਲ ਸੀ ਅਜੀਬ ਤੇ ਨਰਾਲੀ ਉਹਦੀ ਢਾਲਾ ਸੀ ਵੇਖ ਕੇ دیਵਾਨ ਜੱਗ ਹੁੰਦਾ ਸੀ ਹੈਰਾਨ ਉਹਦਾ ਕਰਕੇ ਜਿਦਾਰ ਮਨ ਹੋਮਦਾ ਸੁਖਾਲਾ ਸੀ ਤੀਰ ਬਾਗ ਵਿਨ ਕੇ ਕਲੇਜੇ ਵਿੱਚੋਂ ਪਾਰ ਹੁੰਦਾ ਬਾਣ ਉਹਦੀ ਬਾਣੀ ਸੰਦਾ ਐਸਾ ਅਣਿਆਲਾ ਸੀ ਤੇ ਨਾਮ ਨੂੰ ਜਪਾਮਦਾ ਸੀ ਗਉਆਂ ਨੂੰ ਬਚਾਮਦਾ ਸੀ ਤੇ ਤੋਪ ਉਹਦੀ ਆਲਮ 83 ਜੈਮ ਵਾਲਾ ਸੀ ਐਸੇ ਸਨ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਨਵੀਂ ਚੜ੍ਹਦੀ ਕਲਾ ਵੇਖ ਕੇ ਕੋਈ ਇਹਦੀ ਐਸੀ ਸ਼ਾਨ ਨੂੰ ਬਰਦਾਸ਼ਤ ਨਾ ਕਰ ਸਕੀ ਸਕੀ ਵਕਤ ਦੀ ਗਵਰਨਮੈਂਟ ਹੋਇਆ ਕਿ